ਜੇ ਲੋਕ ਮਹੱਲਾ ਪਹਿਲਾ ਹੋ ਮੈਂ ਕਰੀ ਤਾਂ ਤੂੰ ਨਹੀਂ ਤੂੰ ਹੋਵੇਂ ਇਹ ਅਕਥ ਕਥਾ ਮਨ ਮਾਹੀ ਜਦ ਤੂੰ ਹੋਤੇ ਦੀ ਬਾਣੀ ਦੀ ਉਸ ਇਸ ਤਰੀਕੇ ਨਾਲ ਕਿਹਾ ਹੈ ਆਹ ਮੈਂ ਕਰੀ ਤਾਂ ਤੂੰ ਨਹੀਂ ਜਿੰਨਾ ਚਿਰ ਮੈਂ ਜੋ ਆਪਣੀ ਹੋਣ ਦਾ ਅਹਿਸਾਸ ਰਿਹਾ ਇੱਕ ਵਾਰ ਕੁਛਹਾਉ ਹੋਵੇ ਕਰੀ ਜਿੰਨਾ ਚਿਰ ਮੈਂ ਆਪਣੇ ਆਪ ਦਾ ਵੱਖਰਾ ਵਿजूद ਮੰਨ ਤਾਂ ਤੂੰ ਨਹੀਂ ਜਿੰਨਾ ਚਿਰ ਜਿਹੜੀ ਲਾਈਟ ਹੈ ਤੁਪਾ ਜਾਂ ਮਨ ਮਨੁਬੁੱਧੀ ਆ ਆਪਣੇ ਆਪ ਦੇ ਹੀ ਹੋਠ ਨੇ ਉਹਨਾਂ ਚਿਰ ਜਿੱਤੋਂ ਇਹਨਾਂ ਦਾ ਮੂਲ ਹੈ ਜਿਹੜਾ ਉਹ ਨਹੀਂ ਭਰਾ ਇਹਨਾਂ ਦੀ ਫਕੜਤ ਨਾ। ਉਹਨਾਂ ਜਿਹੜਾ ਆਪਣੇ ਮੂਲ ਨੂੰ ਹੀ ਆਪਣੇ ਆਪ ਨੂੰ ਤਾਂ ਜਾਣਦੇ ਆਣੇ ਆਪਣੇ ਮੂਲ ਨੂੰ ਹੀ ਜਾਣਦੇ ਆਣਗੇ। ਜਦ ਮੂਲ ਨੂੰ ਸੂਰਜ ਨੂੰ ਦੇਖੀਏ ਤਾਂ ਧੁੱਪ ਦੀ ਧੁੱਪ ਦਾ ਫਿਰ ਵਜੂਦ ਵੱਖਰਾ ਨਹੀਂ ਹੈ। ਸੂਰਜ ਸਭ ਕੁਝ ਹੈ ਸਰ। ਧੁੱਪ ਕੁਝ ਨਹੀਂ ਹੈ। ਜੇ ਧੁੱਪ ਨੂੰ ਦੇਖੀਏ ਤਾਂ ਸੂਰਜ ਹੈ ਨਹੀਂ। ਇਕੱਲੇ ਧੁੱਪ ਨੂੰ ਦੇਖੀਏ ਤਾਂ ਸੂਰਜ ਨਹੀਂ ਹੈ। ਜੇ ਸੂਰਜ ਨੂੰ ਦੇਖੀਏ ਫਿਰ ਤੋਂ ਫੇਲੀ। ਜੇ ਸੂਰ ਜਾਇਗਾ ਤਾਂ ਫੇਲੀ। ਤੂੰ ਪਤਾ ਤਾਂ ਵਜੂਦੇ ਵੀ ਕੋਈ ਸੂਰ ਦਾ ਵਜੂਦ ਹੈ। ਤੂੰ ਕਿਹਾ ਮੈਂ ਮੂਣਾ ਇਹ ਇਕੱਠ ਕਥਾ ਇਹ ਇਕੱਠ ਕਥਾ ਮਨ ਦੇ ਵਿੱਚ ਉਜੋ ਆਪਣੇ ਬੋਲ ਕਰਦੇ। ਇਹ ਕੀ ਗੱਲ ਕਹਿਤੀ ਅਸੀਂ ਤੇ। ਮੈਂ ਕਰਦੀ ਜਾਂ ਕਰਦੀ ਰਹੀ ਬੁੱਤੀ ਕਹਿੰਦੀ। ਸਾ ਤੂੰ ਨਹੀਂ ਆਪਣੇ ਬੋਲੂ ਕਹਿੰਦੀ ਆ। ਤੂੰ ਵੀ ਮੈਨੂੰ ਪਤਾ ਲੱਗਿਆ ਵੀ ਤੂੰ ਵੀ ਕੁਝ ਚੀਜ਼ ਹੈ। अब तू ज्ञान नहीं जे तू हैगा ता फिर भेदी बिन गुर तत्व ना पाई है लाख सब माहे सतगुरु मिले ता जा शब्द वसै मन माहे यानी मन का ज्योत स्वरूप है बुद्धि यार मन बुद्धि भी ज्योते मन बुद्धि का ज्योत स्वरूप है यदि ज्योत है उन कह रहे हैं ਕਿ ਮਸਾਤ ਤੇਲ ਹੈ ਤੇਲ ਤੋਂ ਜੋਤ ਪੈਦਾ ਹੁੰਦੀ ਹੈ। ਇਵੇਂ ਉਹਦਾ ਨਾਮ ਦੱਸਤਾ ਹੈ ਜੀ ਜੋਤ ਲਈ। ਫਿਰ ਉਹਰ ਗਿਆਨ ਤੋਂ ਬਿਨਾਂ ਸਤਨਾ ਪਾਈਏ ਸਤ ਸਤ ਤਕਲੀਫਾਂ ਜੀਆ ਜਾ ਸਕਦਾ ਤੇਰੀ ਤੂੰ ਵੀ ਸਮਝਦੀ ਹੁੰਦੀ ਤੂੰ ਕੀ ਹੈ ਤੂੰ ਤਤ ਰੂਪ ਹੈ। ਆਹ ਲੱਖ ਬਸੇ ਸਭ ਮਨਸਾਰਿਆਂ ਦੇ ਵਿੱਚ ਬਸ ਗਿਆ ਉਹ ਜੇ ਤਾਂ ਆਪਣੇ ਆਪ ਨੂੰ ਦੇਖਦੇ ਫਿਰ ਸੂਰਜ ਨੂੰ ਸੂਰਜ ਨੂੰ ਦੇਖਦੇ ਫਿਰ ਆਪਣਾ ਆਪਾ ਜੀ ਉਹਦੇ ਰੂਦੋ ਨੇ ਨਹੀਂ ਦੇਖੇ ਠੀਕ ਹੈ ਇਹਦੇ ਜਾਣਨ ਸਭ ਨਾਲ ਜਾਣਨ ਹੋਏ ਉਹ ਜੱਤਾਂ ਸਾਰਿਆਂ ਦੇ ਵਿੱਚ ਹੀ ਹੈ ਕੋਈ ਘੱਟ ਐ ਸਾਰੇ ਉਹਦੇ ਜਾਣਨ ਨੇ ਸਾਰੇ ਠੀਕ ਹੈ ਜੀ ਹਾਂ ਜੀ ਸਤਗੁਰ ਮਿਲੈ ਤਾਂ ਜਾਣੀਐ ਜਦ ਸ਼ਬਦ ਵਸੈ ਮਨ ਮਾਹੀ ਸਤਗੁਰ ਮਿਲਿਆ ਤਾਂ ਜਾਣੀਐ ਤਾਂ ਗੁਰੂ ਮਿਲ ਕੇ ਸੱਚ ਦਾ ਗਿਆਨ ਕਰਾਉਣ ਵਾਲਾ ਬਿਲਕੁਲੇ ਤਾਂ ਪਤਾ ਲੱਗਦਾ ਸ਼ਬਦ ਵਸੈ ਤਨ ਜਦੋਂ ਮੰਨਦੇ ਵੀ ਗੁਰਬਾਣੀ ਪਾਛੇਵੇ। ਯਾ ਸ਼ਬਦ ਬਸ ਯਾ ਗਿਆਨ ਹੀ ਰਸਲ ਦੇ ਅਸਲ ਦੇ ਵਿੱਚ ਜਿੰਦੀ ਦਾ ਜੀ ਹੈ। ਸਤਗੁਰੂ ਮਿਲੇ ਤਾਂ ਜਾਣੀ ਹੈ ਸਤ ਜਾਣੀ ਹੈ ਕਾਦੇ ਜਦ ਉਹਦਾ ਜਿਹੜਾ ਸ਼ਬਦ ਵਸਾ ਲਈਏ। ਸਮਝ ਲਈਏ ਰੂ ਵੰਨ ਲਈਏ ਫੇਰ ਤਾਂ ਉਹ ਸਤ ਨੂੰ ਜਾਣਿਆ ਜਾ ਸਕਦਾ। ਮੂਰਤ ਤੱਕ ਜਾਇਆ ਜਾ ਸਕਦਾ ਮੂਰਤ ਨੂੰ ਸਮਝਿਆ ਜਾ ਸਕਦਾ। ਜੇ ਗੁਰਬਾਣੀ ਨੂੰ ਮੰਨ ਨਾ ਸਮਝੀ ਨਾ ਫੇਰ ਨਹੀਂ ਉੱਚਾ ਤੱਕ ਪਹੁੰਚਿਆ ਜਾ ਸਕਦਾ। ਹਾਂਜੀ। ਆਪ ਗਿਆ ਬ੍ਰਹਮ ਭਉ ਗਿਆ ਜਨਮ ਮਰਨ ਦੁਖ ਜਾਹੇ ਗੁਰਮਤ ਅਲਖ ਲਖਾਈ ਐ ਉਤਮ ਮਤ ਤਰਾ ਹੈ ਆਪ ਗਿਆ ਜਾ ਆਪਣਾ ਆਪਾ ਗਿਆ ਜਾਂ ਵੇਜ ਜਲੀ ਗਈ ਹੁਣ ਚਲੀ ਗਈ ਬ੍ਰਹਮ ਭਉ ਗਿਆ ਪਰਮਾਰਥ ਭਉ ਵੀ ਚਲਾ ਗਿਆ ਧਰਮ ਕੀ ਜਿਹੜਾ ਮੈਂ ਹੋਣ ਦਾ ਵੀ ਵੇਹੜੀ ਕੋਈ ਹੋਣ ਵੱਖਰੀ ਹੈ ਇਹ ਪਰਮ ਚੁੱਟ ਗਿਆ ਚਲਾ ਗਿਆ ਪਰਮ ਗਿਆ ਬਹਉ ਗਿਆ ਹੈ ਜੀ ਜਲੀ ਜਨਮ ਮਾਨਣ ਦੁੱਖ ਜਾਂ ਜਨਮ ਦਾ ਦੁੱਖ ਹੀ ਚਲਾ ਗਿਆ ਜਨਮ ਕਾਹਦਾ ਜਨਮ ਕਿੱਥੋਂ ਸਦਾ ਸਲਾਮਤ ਹੈ ਜੀ ਤਾਂ ਕੀ ਹੋਣ ਲੱਗਿਆ ਜਨਮ ਮਾਨਣ ਦੁੱਖ ਜਾਣੀ ਗੁਰਮਤ ਦੇ ਉਹੋ ਕੀ ਮੱਤਾ ਹੈ ਜਿਹੜੀ ਗੁਰਬਾਣੀ ਸਿੱਖ ਹੈ ਇਹਦੇ ਨਾਲ ਲੱਖ ਦੀ ਸਮਝ ਆਉਂਦੀ ਹੈ ਲਿਖਾਈ ਜਦੋਂ ਸਮਝ ਆ ਜਾਂਦੀ ਹੈ ਲਖਾਂ ਦਾ ਮੁੱਤ ਚਾਉਣਾ ਹੀ ਹੁੰਦਾ ਹੈ ਕਿ ਤੁਮ ਮੱਤ ਕਰਾਂਗੇ ਇਹ ਉੱਤਮ ਮੱਤ ਹੈ ਇਹਦੇ ਦੀ ਪਰਮਪਰਮ ਦੇ ਨਾਨਕ ਸੋਹੰਗ ਹੰਸਾ ਜਪ ਜਾਪੋ ਤ੍ਰਿਪਾਵਨ ਤਿਸੈ ਸਮਾਹਿ ਜੇ ਹੰਸਾ ਹੈ ਹਾਂ ਜੋ ਮਾਇਆ ਹੋਈ ਹੰਸਾ ਇੱਕੋ ਹੀ ਹੈ। ਫਿਰ ਸਰ ਮਾਇਆ ਨਹੀਂ ਹੈ ਜੇ ਅੱਗੇ ਹੰਸਾ ਦੇਲਾ ਹੈ ਨਾ ਫਿਰ। ਮੈਂ ਫਿਰ ਹੰਸੀ ਹੋਇਆ ਮੈਂ ਥੋੜਾ ਜਿਹਾ ਫਿਰ। ਜਹ ਹੰਸਾ ਨਾ ਦਰ ਮੈਂ ਨਹੀਂ ਹੁੰਦਾ। ਜੋ ਹੰਸਾ ਹੋਈ ਗयो। ਯੱਪੋ ਯੱਪੋ ਇਹਨੂੰ ਸਮਝੋ ਮਾਇਆ ਹੰਸਿਕੋਈ ਨਹੀਂ ਹੋ। ਇਹ ਜੱਪ ਯੱਪ ਨੂੰ ਯਕੋ ਤੇ ਪਵਨ ਇਸੇ ਸਮਾਈ ਹੈ। ਇੱਦਾਂ ਇੱਕ ਤਰ੍ਹਾਂ ਭਵਨ ਕਰਨੇ ਤੋਂ ਬਣੌਦੀ ਜਿਹੜੀ ਜੋਤ ਕੋ ਭਵਨ ਦੇ ਵਿੱਚ ਹੀ ਸਮਝ ਆ ਜਾਂਦਾ ਫਿਰ ਇਹਨ ਭਵਨਾਂ ਦਾ ਚੱਕਰ ਮੁੱਕ ਜਾਂਦਾ ਫਿਰ ਜੰਮਨ ਹਾਂਜੀ ਸੋਹੰਗ ਦਾ ਕੀ ਭਾਵ ਹੈ ਜੀ ਸੋਹੰਗ ਹੰਸਾ ਇੱਕੇ ਸ਼ਬਦ ਸੋਹਣੂ ਦਾ ਮਤਲਬ ਜੋ ਤੁਹਾਨੂੰ ਹੋਈ ਮਾਇਓ ਜੋ ਕੁਛ ਹੈ ਮੈਂ ਪੁੱਛਦੀ ਮੈਂ ਦੱਸੋ ਕਿੱਥੇ ਕਹਿਦਾ ਹੋਇਆ ਕੀ ਜਾਨਾ ਹੈ ਅਸਾ ਪਰ ਇਹ ਕੁਛ ਜਿਹੜੇ ਭਗਤ ਰਵਿਦਾਸ ਜੀ ਦੇ ਗੁਰਦੁਆਰੇ ਬਣਾਏ ਆ ਉਹ ਨਿਸ਼ਾਨ ਸਾਹਿਬ ਤੇ ਸੋੰਗ ਲਿਖ ਦਿੰਨੇ ਪਤਾ ਨਹੀਂ ਕਿਉਂ ਲਿਖਦੇ ਨੇ ਕੀ ਅਰਥ ਕਰਦੇ ਨੇ ਤੇ ਆਪਣੇ ਅਰਥ ਹੈ ਕਿ ਜੋ ਮੈਂ ਉਹੀ ਤੂੰ ਹੈ ਤੇ ਤੂੰ ਹੈ ਮੈਂ ਤੇਰੇ ਤੋਂ ਮੇਰੀ ਹੋ ਗਾ ਮੇਰੇ ਤੋਂ ਤੇਰੀ ਹੋ ਗਈ ਜਪ ਜਪੋ ਤੋਂ ਕੀ ਭਾਵ ਬਣਦਾ ਜਪ ਦਾ ਮਤਲਬ ਜਾਣਨਾ ਹੁੰਦਾ ਜੀ ਇਹ ਜਾਨਵਰ ਜੀ ਹੈ ਇਹਨੂੰ ਜਪ ਇਹਨੂੰ ਸਮਝੋ ਸਮਝਣ ਵਾਲੀ ਕੀ ਤਾਂ ਇਹ ਇਹੀ ਗੱਲ ਸੁਣਨੀ ਵਾਲੀ ਹੈ ਭੈਣ ਦਾ ਮਤਲਬ ਹੈ ਬਾਹਲਾ ਜਪਦੇ ਨੇ ਕੋਈ ਕੋ ਚੱਕਦਾ ਰਾਮ ਰਾਮ ਜਪਦਾ ਉਹ ਰਾਮ ਰਾਮ ਜਪੜਨਾ ਬਗੋ ਨੇ ਸਭ ਕੁਝ ਬਾਹ ਕੋ ਜੀ ਠੀਕ ਹੈ ਜੀ ਤਾਂ ਹੀ ਰਾਮ ਇਹ ਸਭ ਰਾਮ ਬਾਰੇ ਦਾ ਪਤਾ ਨਹੀਂ ਬਾਹ ਤਾਂ ਗੱਲ ਰਾਮ ਦਾ ਬਾਹ ਬੋਈ ਬਠਾ ਮਹੱਲਾ ਤੀਜਾ ਮਨ ਮਾਨਕ ਜਿਨ ਪਰਖਿਆ ਗੁਰ ਸ਼ਬਦੀ ਵਿਚਾਰ ਸੇ ਜਨ ਵਿਰਲੇ ਜਾਣੀਐ ਕਾਲੀ ਯੁਗ ਵਿੱਚ ਮਨ ਆਪਣਾ ਮਨ ਪਰਖ ਲਿਆ ਵਰਣ ਤੋੜੇ ਦੀ ਮਨ ਵਰਗੀ ਕੋਈ ਹੋਰ ਚੀਜ਼ ਹੈ ਨਹੀਂ ਜਿਨਾਂ ਨੇ ਪਰਖ ਲਿਆ ਮਾਨਕਾ ਹੋਰ ਹੱਤਿ ਵਿਚਾਰ ਉਹ ਰੋਪਦੇਸ ਦੇ ਵਿੱਚ ਵਿਚਾਰ ਲਿਆ ਮਨ ਹੁੰਦਾ ਕੀ ਹੈ ਉਹ ਸ਼ਬਦੀ ਵਿਚਾਰ ਕਿਉਂ ਬੰਦੂ ਫਾਮੀਲੇ ਪਰਖਲੇ ਅਸੀ ਹੈ ਉਸ ਕਮ ਵੀ ਵੀ ਯਾਰ ਕੇ ਜਨ ਦੇ ਨਾਲ ਜਾਣੀ ਫਲਜੋ ਤੋ ਪੁੱਛਿਆ ਤੁਨ ਸਾ ਇਹਦੇ ਰਵੇ ਲੈ ਰਿਹਾ ਜੇ ਅਜ ਵੀ ਜਿਹਨਾਂ ਦੇ ਮਨੂ ਜਾਣੇ ਆ ਪਰਖਿਆ ਬਹੁਤੇ ਜਿਹੇ ਅਜ ਹੁੰਦੇ ਹੁੰਦੇ ਜਿਹਨਾਂ ਲਈ ਜਾਣੀ ਨੂੰ ਆਪ ਮਿਲ ਰਹਾ ਓਮੇ ਮਾਰ ਨਾਨਕ ਨਾਮ ਰਤੇ ਦੁਤਰ ਤਰੇ ਪੌਜਲ ਬਿਕਮ ਸੰਸਾਰ ਆਪਣੇ ਆਪ ਨੂੰ ਜਦੋਂ ਆਪ ਮਿਲ ਕੇ ਰਹਿ ਜਾਂਦਾ ਇੱਕ ਹੋ ਕੇ ਰਹਿ ਜਾਂਦਾ ਹੋ ਕੇ ਦੁੱਖ ਮਾਰ ਲੈਂਦਾ ਆਪਣਾ ਜੀਵ ਵੱਖਰਾ ਬਸੁਰ ਤੋਂ ਫੜ ਜਾਂਦਾ ਹੈ ਨਾਨਕ ਨਾਮ ਰਤੇ ਐਸਾ ਜਿਹੜੇ ਨਾਮ ਨਾਲ ਜਾਂਦਾ ਹੈ ਦੁਤਰ ਪਰੇ ਪਦ ਜਿਹੜਾ ਭਗਤ ਆਸੇ ਹਾਜ਼ਰ ਸਾਹਿਬ ਜਿਹੜੂ ਕਹਿੰਦੇ ਨੇ ਉਹ ਉੱਤਰ ਜਾਂਦੇ ਨੇ। ਕੋਜਲਿਕਮ ਸੁਖਾਰ ਬਿਕੂ ਪੋਜਲ ਸੰਸਾਰ ਜਿਹਨੂੰ ਕਹੇ ਜਦੇ ਕੋ ਪਰ ਇਹ ਉੱਤਰ ਜਾਂਦੇ ਨੇ ਉਹ ਜਿਹੜੇ ਆਪ ਦਾ ਵਿजूद ਜਿਹੜਾ ਵੱਖਰਾ ਉਹਨੂੰ ਢੋਹਾਰ ਜਾਂਦੇ ਨੇ। ਹਾਂਜੀ। ਪੌੜੀ ਮਨਮੁਖ ਅੰਦਰ ਨਾ ਭਾਲਣੀ ਮੁਠੇ ਮਤੇ ਚਾਰੇ ਕੁੰਡਾਂ ਭਵ ਥੱਕੇ ਅੰਦਰ ਤਿੱਖ ਤੱਤੇ ਅੰਦਰ ਦਾ ਕੌਲ ਨਹੀਂ ਮਨੁੱਖਾ ਕਪੜੇ ਅੰਦਰੋਂ ਨਹੀਂ ਕੁਝ ਕਾੜਦੇ ਬਾਹਰੋਂ ਕਾੜਦੇ ਨੇ ਉਹ ਫਿਰ ਜਾਰ ਮੰਡੀ ਬੈਠੇ ਨੇ ਉਸ ਤੇ ਅੰਮ ਬਥੇ ਉਹਨਾਂ ਨੇ ਆਪਣਾ ਅੰਕਾਰ ਦੀ ਨਾ ਮਨ ਮੱਦੇ ਉਹ ਹੋਏ ਨੇ ਮਾਨਮਾ ਤੇ ਖੜੇ ਹੋਏ ਨੇ ਚਾਰੇ ਕੁੰਟਾਂ ਦਾ ਭਗਤ ਤੇ ਚਾਰੇ ਕੁੰਟਾਂ ਦੇ ਸਿਖਰ ਤੇ ਕੀਰਤ ਬਣਾ ਆ ਗਏ ਫਤੌਰ ਤੇ ਥਕ ਲੈਂਦਾ ਨਹੀਂ ਮਿਲਦਾ ਪੂਛ ਵੀ ਨਹੀਂ ਅੰਦਰ ਸਿੱਖ ਬੱਤੇ ਅੰਦਰੋਂ ਤ੍ਰਿਗਣਾ ਜਿਹੜੀ ਹੈਗੀ ਵਾਇਆ ਦੀ ਭੁੱਖ ਵੀ ਜਾਂਦੀ ਹੈ ਹਾਂਜੀ ਸਿਮਰਤ ਸਾਸਤ ਨਾ ਸੋਧਨੀ ਮਨਮੁਖ ਵਿਗੁੱਤੇ ਬਿਨ ਗੁਰ ਕਿਨੇ ਨਾ ਪਾਇਓ ਹਰ ਨਾਮ ਹਰ ਸੱਤੇ ਜਿਹਨਾਂ ਦਾ ਸਾਸਤ ਨਾ ਸੋਧਨੀ ਜਿਹਨਾਂ ਨੇ ਜਿਹੜੇ ਸਾਸਤ ਸੋਧੇ ਨਹੀਂ ਨਾ ਹਣੇ ਬੜੇ ਹੀ ਨੇ ਕੋਧ ਨਹੀਂ ਹਾਂ ਕੋੜੇ ਨੂੰ ਨਾ ਹਾਂ ਮਾਨੁਮੁਖ ਵਿਗਤ ਵਿਗੁਤ ਹੈ ਉਹ ਮਾਨੁਮੁਖ ਜਿਹੜਾ ਉਹ ਕਹਿੰਦੇ ਕਿਸੇ ਨੇ ਨਹੀਂ ਕੁਝ ਪ੍ਰਾਪਤ ਹੋਇਆ ਗਿਆਨ ਦੀ ਪ੍ਰਾਪਤੀ ਹੈ ਸੰਸਾਰ ਤੋਂ ਪ੍ਰਾਪਤੀ ਕੁਝ ਵੀ ਨਹੀਂ ਆਲ ਹਰ ਸੱਤੇ ਆਲ ਨਾਮ ਉਹ ਹਰ ਇਹਨੂੰ ਸਮਝਣ ਦੀ ਲੋੜ ਹੈ ਹਰ ਨਾਮ ਉਹ ਹਰ ਸਮਝਣਾ ਹੈ ਜਿਹੜਾ ਹਮੇਸ਼ਾ ਰਹਿਣ ਵਾਲਾ ਜਿਵੇਂ ਹੱਸੀ ਵੇਖਾ ਰਹੇ ਦੀ ਹਰ ਵੀ ਇਹ ਜਿਹੜੀ ਆਪ ਦੀ ਮੂਰਤੀ ਬਣਾਈ ਬੈਠੇ ਤਾਂ ਮਾਇਆ ਉਹ ਤਾਂ ਰਹਿਣ ਵਾਲੀ ਦੀ ਵਿੱਚ ਇਹ ਸੋਚਾਂ ਤਾਂ ਸਭ ਕਿੰਨੇ ਸੀ ਉਹ ਮੂਰਤੀ ਨੂੰ ਵਧੀ ਜਾਂਦਾ ਉਹ ਜਿਹੜੀ ਕਹੀ ਹੋਈ ਗੱਲ ਉਹ ਨੂੰ ਸਮਝਾ ਲਈ ਮੂਰਤੀ ਫਟ ਕੇ ਹੋ ਸਕਦੀ ਹਾਂਜੀ ਹਰ ਜਪ ਹਰ ਗੱਤੇ ਸਤਿਗੁਰ ਧਿਆਨ ਵਿਚਾਰਿਆ ਜਿਹਨੇ ਤਤ ਵਸਤੂ ਵਿਚਾਰੀ ਹੈ ਤਤ ਨੂੰ ਆਪਣਾ ਸਰਤਨ ਰੂਪ ਚਾਰਨਾ ਤਤ ਦਾ ਗਿਆਨ ਪ੍ਰਾਪਤ ਕੀਤਾ ਤਾਂ ਉਹਨਾਂ ਦੀ ਭੂਤਿਓ ਦੇ ਚਲੀਏ ਗਤੀ ਨਹੀਂ ਤਾਂ ਉੱਥੇ ਅੜੇ ਖੜੇ ਨੂੰ ਭੂਤਿਓ ਜੁੜੇ ਖੜੇ ਨੇ ਐਸੇ ਲੋਕ ਅੰਦਰੇ ਰਹਿੰਦੇ ਨੇ ਧਰਮ ਦੇ ਵਿੱਚ ਪੌਜ ਕਰੀ ਰਹਿੰਦੇ ਨੇ ਪਰ ਉਹਨੂੰ ਦੰਦੜ ਖੱਟ ਕੇ ਤੁਰਦੇ ਨੇ ਕਤੀਬ ਤਾਂ ਬੜੀ ਬੁੱਧੀਯੋਗ ਜਿਹੜਾ ਤਾਰੀਖ ਦੁਰੀਏ ਤਾਂ ਪਰ ਬੈਠ ਕਰਦੇ ਨੇ ਮੇਰਾ ਸਾਰੀ ਗੱਲ ਇਹ ਸਮਝ ਆਉਣ ਲੱਗਦੀ ਹੈ ਜਦੋਂ ਤੱਕ ਗਿਆਨੀ ਵਿਚਾਰ ਕਰਦੇ ਨੇ ਮਾਇਆ ਤਾਂ ਉੱਪਰ ਜਾਂਦੇ ਨੇ ਹਾਂਜੀ ਠੀਕ ਹੈ ਜੀ ਇੱਥੇ 19ਵੀਂ ਪੌੜੀ ਸਮਾਪਤੀ ਹੈ ਜੀ